शलोक महला पहला धनवंतता इवहि कह आवरी तन को जाओ नानक नृत्यन तित दिन जित दिन विसरै नाऊ हां धनवंतता जेड़े आधी संसारी तांदे जुड़े हुए संसारी तांदू थाने गुण ज्ञानी दे गुरुखणा है ओ नाम नु थाने गुण दे ज्ञानी होदा नाम है ਇਥੇ ਆ ਕੇ ਸੰਠਾਰੀ ਉਹ ਜਿਹੜੇ ਨੇ ਧੰਕਤ ਅਲੱਗ-ਅਲੱਗ ਹੋ ਜਾਂਦੇ ਨੇ ਉਹਦਾ ਸ਼ੁਰੂ ਤੇ ਵੈਸੇ ਲੱਗਦੇ ਬੁੱਢੋ ਜਿਹਾ ਲੱਗਦੇ ਉਹ ਪਹਿ ਪੂਰ ਬਲੂਆ ਕਿਹੜਾ ਇੱਕ ਕਹੇ ਤਦ ਤੱਕ ਇਹ ਵੀ ਕੋ ਨੂੰ ਅਗਰੀ ਕੋ ਜਾਓ ਘਾਇ ਆ ਜਿਹੜਾ ਰੋਟੀ ਬਣਾ ਦੀ ਚੱਲਣਾ ਗੱਲ ਆਇਆ ਫਿਰ ਦੀ ਮੈਡੀਕਲ ਨਹੀਂ ਖੋਲ ਲਿਆ ਉਹ ਤੁਹਾਨੂੰ ਜਮਾ ਰੱਖੋ ਪਤਾ ਨਹੀਂ ਕਿਹੜੇ ਵੇਲੇ ਕਿੰਦੀ ਲੋੜ ਪੈ ਜਵੇ ਜੇ ਪਿਆਵੀ ਆ ਤਾਂ ਜਮਾ ਕਰੀ ਜਾਓ ਅਗਲੀ ਹੋਰ ਕੱਲ੍ਹ ਆਓ ਕਿੱਥਾ ਕਰੋ ਇਹਨੂੰ ਤੁਹਾਨੂੰ ਜਾਲੇ ਭਰੋ ਜਾਨ ਕਰਨੈ ਦਾ ਦਰ ਤੱਕ ਜਦੋਂ ਤੰਗਾ ਹੋਤਾ ਤੇ ਅੰਦਰ ਉਦਣੀ ਸੀਗਾ ਜਿੱਤ ਤੈਨ ਵਿਸਰੇ ਨਾ ਜੰਦਾਂ ਨੂੰ ਨੇ ਲੋਹੇ ਤਿਆਗਤਾ ਦਿਨ ਤੱਕ ਸੀ ਇਹ ਤੁਹਾਨੂੰ ਉਹਦਾ ਉਹ ਜਿਹੜਾ ਤੂਬਾ ਤੁਹਾਡੇ ਅੱਖ ਦੀ ਕੋਈ ਆ ਮੂਰ ਕਹੇ ਤੁਹਾਨੂੰ ਉਹਨਾਂ ਜਮਾ ਕਰੇ ਜਾਂਦਾ ਜ਼ੂਮ ਉਹ ਉਹਨੂੰ ਤੁਹਾਡਾ ਕਿਲੋ ਦਿੰਦਾ ਇਹਦੇ ਵਰਤਨ ਉਹਦਾ ਤਾਂ ਖਜਾਨੇ ਲੋਕਾਂ ਨੇ ਕੇ ਵਰਗੇ ਵਰਤਨ ਵਾਲੇ ਤੇ ਦੇ ਰੋ ਜਿਹੜਾ ਸੰਸਾਰੀ ਤੁਹਾਡੇ ਨੂੰ ਗੁਰਬਾਣੀ ਨਹੀਂ ਬਦਲੂ ਅਸੀਂ ਸੋਲੋ ਜਿੱਦਲ ਦਾ ਚੜਾਇਆ ਹਾਂ ਤੇ ਅਸੀਂ ਸਾਰੇ ਵਿਚਾਰ ਤਾਂ ਨਹੀਂ ਸਾਡਾ ਬਜਟੇ ਇਹਦੇ ਤੇ ਖੜਾ ਸਾਰੀ ਤਾਂ ਦਾ ਬਜਟ ਹੈ ਚਲੋ ਗੋੜੀ ਕਮੇਟੀ ਨਾਂ ਸਾਹਿਤਾ ਦੀ ਗੱਲ ਹੈ ਗੁਰੂ ਇਸ ਗੱਲ ਦਾ ਪ੍ਰਚਾਰ ਇਹਦੀ ਹੈ ਰਾਜ ਤੇ ਫਿਰਦਸ ਤੇ ਚੱਤਦਾ ਨਾ ਜਿੱਤੇ ਨੂੰ ਚੱਲੇਗਾ ਰਾਜ ਵਿਅਸਿਕ ਧੰਨਵਾਸ ਤੇ ਜਿਹੜੇ ਕਹਿੰਦੇ ਨੇ ਨਰਾਜ ਕਰ ਲੇ ਸਾਰੀ ਵਿਚਾਰਧਾਰਾ ਹੀ ਉੱਠੀ ਫੇਰ ਗੁਰੂ ਜੀ ਜਦੋਂ ਸੂਰਜ ਚੜਦਾ ਹੈ ਜਦੋਂ ਪੂਰਾ ਨਾ ਅਗਿਆਨਤਾ ਦੀ ਰਾਤ ਟੁੱਟ ਜਾਂਦੀ ਖਤਮ ਹੋ ਜਾਂਦੀ ਹੈ ਪੂਰਜ ਚੜ੍ਹੇ ਹੈ ਨਾ ਉਦੋਂ ਸਿਰਫ ਦੋ ਪਦਾਰਥਾਂ ਨਾਲ ਗਿਆਨ ਹੈ ਕਈ ਕਬੀਰ ਪਰ ਭਿਆ ਪਰਗਾਸਾ ਉਦੇ ਭੰਗਮ ਕੀਤੋ ਸ਼ਬਦ ਗੁਰੂ ਪ੍ਰਗਟ ਹੋਏ ਨਾ ਸੂਰਜ ਚੜਿਆ ਰਹਿੰਦੇ ਨੇ ਫਿਰ ਵਿయోగ ਫਿਰ ਸਰੀਰਿਸ ਨਾਲ ਮਾਇਆ ਨਾਲ ਵਿਜੋਗ ਹੋ। ਸੰਸਾਰ ਨਾਲੋਂ ਵੀ ਵਿਜੋਗ ਹੋ। ਫਿਰ ਤੁਮ ਸੰਗ ਜੋੜੀ ਅਬਰ ਸੰਭੋੜੀ। ਫਿਰ ਸ਼ਬਦ ਗੁਰੂ ਨਾਲ ਜੁੜ ਕੇ ਸੰਸਾਰ ਨੂੰ ਵਿਜੋਗ ਹੋ ਗਿਆ। ਸਾਰੀ ਮਾਇਆ ਨਾਲੇ ਵਿਜੋਗ ਹੋ ਗਿਆ। ਸਰੀਰ ਨੂੰ ਵੀ ਵਿਜੋਗ ਹੋ ਗਿਆ। ਪੂਰ ਤੇ ਚੜ੍ਹੇ ਵਿਜੋਗ। ਸਭ ਸੇ ਆਰਜਾ। ਛਾਰ ਦਾ ਜਦ ਪੂਰ ਤੇ ਚੜ੍ਹਦਾ। ਸਭ ਆਰਜਾ। ਔਰ ਹਰ ਦੇ ਆਰਜਾ ਘਟਦੀ ਕੀ ਲਈ ਜਤੀ। ਬਾਹਰ ਜੇ ਸੂਰਜ ਦੀ ਗੱਲ ਕਰੀਏ ਤਾਂ ਜਿਹੜੀ ਅਸਮ ਸਾਰੀ ਉੱਗਣ ਘਟਦੀ ਠੀਕ ਹੈ ਅੰਦਰ ਸੂਰਜ ਚੜ੍ਹੇ ਨਾਲ ਸਤਜੀਵਨ ਹੋ ਗਿਆ ਫਿਰ ਤਾਂ ਆਰਜਾ ਘਟਣ है ਦਾ ਮਤਲਬ ਨਹੀਂ ਹੈ ਤਾਂ ਹਾਲੇ ਸੂਰਜ ਘਟਦੀ ਹੈ ਉਦੋਂ ਲੈ ਸੂਰਜ ਚੜ੍ਹੇ ਦੇ ਬਾਅਦ ਉੱਪਰ ਘਟਦੀ ਵੀ ਹੈ ਫਿਰ ਫਿਰ ਤਾਂ ਸਤਜੀਵਨ ਜੋਜੀ ਅਨਗੋਤ ਤੱਪ ਹੋਵੇ ਜੇ ਤੰਦ ਘੜ ਕੇ 2 ਘੰਟੇ ਬਾਹਰ ਲਾਤ ਹੋਵੇ 2.5 ਹੋਵੇ ਜਿਹੜਾ ਜੁੜਿਆ ਹੋਇਆ ਉਹ ਤਾਂ ਹਾਰ ਜਾਊਗਾ ਜੇ ਤਲਬੰਦ ਦੇ ਨਾਲ ਭੋਗ ਦਾ ਗਿਆਨ ਭੁਗਤ ਗਿਆਨ ਦਿੱਤੇ ਆਪ ਜੇ ਇਹ ਪਹੁੰਗਾ ਫਿਰ ਜਿੱਤ ਗਿਆ ਬਾ ਕੋਈ ਹਾਰੇ ਹੋ ਜਣ ਜਿਹੜਾ ਗਿੱਤੂਆ ਕੌਣ ਬਾ ਜਿਹੜਾ ਗਿਆਨ ਨੂੰ ਹੋ ਬਣਾਊਗਾ ਮ੍ਰਿਭ ਗਾਂਧੀ ਦਾ ਪਹੁੰਚਣ ਜਦੋਂ ਗੁਰਮਤਿ ਦਾ ਗਿਆਨ ਹੈ ਜੇ ਕੋ ਜਨ ਤਾਂ ਜੀਵ ਕਲਿਆ ਦੇ ਹੀ ਬਾਜੀ ਹਾਰਦੀ ਜਿਹੜਾ ਗੁਰੱਖਾ ਜੀ ਦਾ ਦੌਤੇ ਹੈ ਜੂ ਹੈ ਜੇ ਤਾਂ ਮਾਇਆ ਨਾਲ ਜੁੜਿਆ ਲਿਆ ਗਿਆ ਫਿਰ ਤਾਂ ਹਾਰ ਗਿਆ ਜੇ ਮਾਇਆ ਛੱਡਤੀ ਪੱਕ ਗਿਆ ਪੱਕ ਕੇ ਫਲ ਭੁੱਲੀ ਫਿਰ ਗਿਆ ਫਿਰ ਗੁਰਦੀ ਦੇ ਅੰਦਰ ਆ ਗਿਆ ਫਿਰ ਆਪਣੇ ਗੁਰ ਨਾਲ ਜੁੜ ਗਿਆ ਫਸ ਫਿਰ ਬਾਜੀ ਜਿੱਤ ਗਿਆ ਜੀਵਨ ਪ੍ਰਾਪਤ ਕਰ ਗਿਆ ਚਾਰੇ ਪਦਾਰਥ ਲੈ ਗਿਆ ਫਿਰ ਉਹ ਜਿੱਤ ਗਿਆ ठीक है ਜੀ ਇਹ ਪਿਛਲੀ ਹੀ ਪੰਕਤੀ ਨਾਲ ਮਿਲ ਕੇ ਚੱਲਦਾ ਵੀ ਜੇ ਤਾਂ ਅੰਦਰ ਸੂਰਜ ਚੜ ਗਿਆ ਤਾਂ ਤਾਂ ਦਾ ਜਿੱਤ ਗਿਆ ਜੇ ਬਾਹਰ ਸੂਰਜ ਆ ਫਿਰ ਹਾਰ ਗਿਆ ਪਿਛਲੀ ਪੰਕਤੀ ਦੀ ਵਿਆਖਿਆ ਹੀ ਕੀਤੀ ਇਹਨੇ ਗਾਹਾਂ ਆ ਕੇ ਹਾਂਜੀ ਖੋਲਿਆ ਉਸੇ ਗੱਲ ਨੂੰ ਦੁਬਾਰਾ ਜੀ ਸਭ ਕੋ ਭਰਿਆ ਫੂਕ ਆਖਣ ਜਿਹੜਾ ਪਮਣ ਕਾ ਥਮਾ ਰક્ત ਗੋਮਦ ਕਾ ਘਾਰਾ ਬਾਕੀ ਦਾ ਰક્ત ਗੋਮਦ ਕਾ ਵਗਾਰਾ ਹੈ ਇਹ ਸਰੀਰ ਥਮਿਆ ਹੋਇਆ ਕਹਾ ਜਿਹੜੀ ਪੂਕਾ ਸਾ ਲੈਂਦਾ ਆਖਣ ਕਹਣਾ ਧੱਬੀਏ ਬਸ ਚੜੀਦਾ ਹੈ ਉਹ ਗੋਲੀ ਜਾਂਦਾ ਰੁਕਦਾ ਨਹੀਂ ਨਹੀਂ ਹੈ ਸੁਣਦਾ ਨਹੀਂ ਹੈ ਗੱਲ ਸਭ ਕੋਈ ਆ ਕੇ ਇੱਥੇ ਕਹਦਾ ਤੂੰ ਮੇਰੀ ਝੁਲ ਕੋ ਸਿੱਖ ਆਇਆ ਸੀ ਕੁਝ ਸਿੱਖਿਆ ਲੈਣ ਆਇਆ ਸੀ ਸਿੱਖਿਆ ਦੇਣ ਲੱਗ ਗੁਰੂ ਬਣ ਕੇ ਬਹਿ ਗਿਆ ਗੁਰੂ ਪਹਿਲੇ ਹੀ ਬਣ ਗਿਆ। ਭੂਖ ਹਮੇਸ਼ਾ ਤੇ ਤਾਂ ਨਹੀਂ ਕਿਹਾ ਜੀ ਸਭ ਕੋ ਭਰਿਆ ਭੂਖ। ਆਪਾਂ ਹੁੰਦੇ ਨੂੰ ਕਹਿੰਦੇ ਵੀ ਭੂਖ ਭਰੀ ਹੋਈ ਆ। ਠੀਕ ਆ। ਵੀ ਇਹ ਦੋਹੇ ਇੱਕ ਤਾਂ ਵੈਸੇ ਹਵਾ ਸਰੀਰ ਚ ਇੱਕ ਹੋਂਮੇ ਦਾ ਵੀ ਭਰਿਆ ਹੋਇਆ ਹੈਂ ਕਰਕੇ ਤਾਂ ਸਾਹ ਨੂੰ ਜੀਵਨ। ਕੋ ਜੋ ਵੀ ਬੰਦ ਹੈ ਜੀ ਨਾ ਪ੍ਰਾਣ ਵਾਯੂ ਉਹ ਨਰ ਤਾਂ ਬੰਦਾ ਨਹੀਂ। ਉਹਨਾਂ ਕਹਾਰਾ ਖਾਏ। ਪ੍ਰਾਣ ਦਾ ਆਰੋਗ ਦੇ ਦੇ ਅਪਣੀ ਭੂਲੂ। ਰਬ ਜੀ ਤੂੰ ਮੇਰੇ ਪ੍ਰਾਣ ਦਾ ਆਧਾਰ ਉਹ ਮੰਨਦੇ ਨੇ ਹਵਾ ਨੂੰ ਪ੍ਰਾਣ ਦਾ ਆਇਆ ਤਾਂ ਇਸਰੀਰ ਦਾ ਪ੍ਰਾਣ ਆਧਾਰ ਹੈ ਨਾ ਉਹ ਸਰੀਰ ਨਾਲ ਜੁੜਿਆ ਹੋਇਆ ਜਿਹੜਾ ਹੈ ਨਾ ਉਹ ਫੂਕ ਰੂਹ ਮੰਨਦੇ ਵੀ ਹੀ ਪ੍ਰਾਣ ਦਾ ਆਧਾਰ ਠੀਕ ਹੈ ਜੀ ਨਾਨਕ ਵੇਖੇ ਆਪ ਫੂਕ ਕਢਾਏ ਠਹਿ ਪਵੇ ਕਹਿੰਦੇ ਜੀ ਫੂਕ ਇੱਕ ਸਾਹ ਹੈ ਤੂੰ ਆਦਮੀ ਹੈ ਇੱਕਦਮ ਜਦ ਨਿਕਲੇ ਫੂਕ ਉਹ ਠਹਿ ਹੋ ਗਿਆ ਤੂੰ ਕਹਿੰਦੇ ਆਪ ਰਹੀ ਹੈ ਤੂੰ ਕਹਿੰਦੇ ਵਸਤੂ ਦੀ ਹੈ ਸਾਲ ਇੰਦੀ ਸਭ ਲਵਾਇਆ ਇਹਦਾ ਇਹ ਵੀ ਹੋ ਸਕਦਾ ਜੇ ਉਹ ਹਮੇਂ ਗਈ ਤਾਂ ਉਸ ਤੋਂ ਬਾਅਦ ਫਿਰ ਮੰਨ ਤੈ ਪ੍ਰਭ ਜੀ ਤੂੰ ਮੇਰੇ ਪ੍ਰਾਨਾਂ ਦਾ ਹਾਰਾ ਫਿਰ ਆਉ ਅਸਲ ਤੇ ਬਿਰਾਕਾਰੀ ਸਰੀਰ ਤੇ ਅਦਲੇ ਸਰੀਰ ਤੇ ਚਲਾ ਜਾਊਗਾ ਫਿਰ ਅਦਲੇ ਸਰੀਰ ਦੇ ਜੀਵਨ ਦੀ ਗੱਲ ਤੇ ਆ ਜੂਗਾ ਬਾਹਰਲੇ ਸਰੀਰ ਤੇ ਮਾਇਆ ਦੇ ਨਾਲ ਜੁੜਿਆ ਹੋਇਆ ਕਰਕੇ ਜਿਹੜਾ ਧਨ ਵੀ ਉਹ ਜਿਹੜਾ ਮਾਇਆ ਵਾਲਾ ਹੀ ਲੈ ਕੇ ਆਉਂਦਾ ਨਾ ਬਾਹਰ ਬਾਹਰ ਇਹਦੇ ਕਪੜੇ ਅਬਰ ਕਾਜ ਹੈ ਅਬਰ ਕਾਜ ਤੇ ਕਿਤੇ ਨਾ ਕਾਉ ਸੰਸਾਰੀ ਕੰਮ ਲੈ ਇਹ ਕਹਿੰਦੇ ਆਤਮਾ ਨੇ ਕਿਸ ਦਾ ਬਰੂ ਰਿਖੇ ਇੱਥਾਂ ਜਿਹੜਾ ਤੂੰ ਕਹਿੰਦਾ ਜਿਉ ਜੀ ਔੜੀ ਸਤ ਸੰਗਤ ਵਿੱਚ ਲੋਕ ਮਿਲਦਾ ਅੰਦਰ ਉਹ ਸੱਚ ਨਾਲ ਜੁੜਨੇ ਜੇ ਜੇ ਬੰਦ ਸੱਚ ਨਾਲ ਜੁੜਦਾ ਤੇਯਾਰਾ ਹੁੰਦਾ ਹੈ ਤਾਂ ਨਾਮ ਨਿਧਾਨ ਮਿਲਦਾ ਹੈ ਤਾਂ ਸਮਝੋ ਨਾਮ ਨਿਧਾਨ ਦੇ ਕੋਲ ਹੈ ਇਹ ਲੈ ਲਿਆ ਜਾਂ ਸੱਚ বুঝ ਲਿਆ ਉਹ ਬੇਛੜਤੀ ਸਤ ਸੰਗਤ ਦੇ ਵਿੱਚ ਜਿੰਨਾ ਜਰ ਆਪਣੇ ਗੁਰ ਨਾਲ ਜੁੜਿਆ ਹੋਇਆ ਹੈ ਜਿਹੜਾ ਗੁਰ ਸਤ ਸਰੂਪ ਉਹਦੇ ਨਾਲ ਜੇ ਜੁੜਿਆ ਹੈ ਤਾਂ ਸਤ ਹੈ ਸਤ ਅੰਦਰ ਹੁੰਦੀ ਹੈ ਬਾਹਰ ਵੀ ਹੁੰਦੀ ਅਸੀਂ ਬਾਹਰ ਆਦਮੀ ਇਹਨੇ ਇਕੱਠ ਨੂੰ ਸੱਚ ਨੂੰ ਕਿੱਦਾਂ ਗੁੰਨ ਲਿਆ ਗਮਨਦਾਨ ਫਿਰ ਕਿੱਥੋਂ ਆਉਣਾ ਸੀ ਜਾਵਣ ਤੇ ਆਦਮੀ ਫਿਰ ਵੈਗਰੂ ਵੈਗਰੂ ਰਹਿ ਗਿਆ ਜੀ ਰਹਿਣਾ ਤਾਂ ਬਾਹਰ ਤਾਂ ਉਹ ਬਾਹਰ ਜਿਹੜਾ ਗਿਆਨ ਸੀ ਸ਼ਬਦ ਵਿਚਾਰ ਵਾਲਾ ਨਾਮ ਨਿਦਾਨ ਛੱਡ ਦਿੱਤਾ ਵਿਚਾਰ ਕਰ ਸਕਦੇ ਸ਼ਬਦ ਵਿਚਾਰ ਕਰਦੇ ਜੇ ਤਾਂ ਬੈਠ ਕੇ ਇਕੱਠੇ ਹੋ ਕੇ ਫਿਰ ਤਾਂ ਗਮਨਦਾਨ ਸੀ ਫਿਰ ਤਾਂ ਸਾਰੇ ਸੱਚ ਨਾਲ ਜੁੜਦੇ ਗੁਰਬਾਣੀ ਦੀ ਵਿਚਾਰ ਨਾਲ ਜੁੜਦੇ ਸੱਚ ਨਾਲ ਜੁੜਦੇ ਅੰਦਰ ਜੁੜ ਕੇ ਹੀ ਇਹ ਵਿਚਾਰ ਹੋ ਸਕਦੀ ਹੈ ਵਿਚਾਰ ਦੁਆੜੀ ਵਿੱਚ ਹੁੰਦੀ ਹੈ ਅਕੀਦਿਓ ਜੇ ਤਰ ਮਨੁੱਖ ਵੀ ਇਕੱਠੇ ਬੈਠਣਗੇ ਤਾਂ ਤਾਂ ਬਰ ਇਕੱਠਾ ਹੋਊਗਾ ਬਰੁਹਦੀ ਤਾਂ ਕੋਈ ਗੱਲ ਕਿੱਤ ਦੇ ਨਾਲ ਜੁੜਦੀ ਵਿਚਾਰ ਫਿਰ ਮਾਇਆ ਮੈਨੂੰ ਸਰਦਾ ਤਾਂ ਹੈ ਜੀ ਪਰ ਹੁਣ ਮਾਇਆ ਵਾਸਤੇ ਜ਼ਿੰਦਗੀ ਲਾ ਦੇਣੀ ਦੂਆ ਵਸਾ ਕੇ ਪਾਇਆ ਤਾਂ ਭੱਜ ਨਹੀਂ ਸਕਦਾ ਮਾਇਆ ਦੇ ਪਿੱਛੇ ਵੀ ਨਹੀਂ ਭੱਜ ਸਕਦਾ ਠੀਕ ਹੈ ਜੀ ਜਿੱਥੋਂ ਹਰ ਪਾਇਆ ਜੇ ਤਾਂ ਹਰ ਵੀ ਪ੍ਰਾਪਤੀ ਹੋਣੀ ਆਪਣੇ ਰੂਹ ਨਾਲ ਜੋੜਦੇ ਜੇ ਸੱਤ ਸੱਤ ਤਾਂ ਹੈ ਕਿ ਰੂਹ ਨਾਲ ਜੋੜਦੀ ਹੈ ਕਿ ਉਹ ਬਾਹਰ ਕਹਾ ਕਥਾ ਕਹਣ ਲਿਏ ਸੁਣਾਉਂਦੀ ਹੈ ਸਾਖੀਆਂ ਸੁਣਾਉਂਦੀ ਹੈ ਫਿਰ ਸੱਜਣ ਅੰਤ ਆਤਮਾ ਆਪਣੇ ਰੂਹ ਨਾਲ ਜੋੜਦੀ ਨਹੀਂ ਹੈ ਉਹ ਤਾਂ ਬਾਹਰ ਜੋੜਦੀ ਹੈ ਜਦੋਂ ਅਸੀਂ ਸਿਰਫ ਇਤਿਹਾਸ ਤੇ ਆ ਕੇ ਰੁਕ ਗਏ ਇਹਦਾ ਹੀ ਪ੍ਰਚਾਰ ਕਰਨ ਲੱਗੇ ਉਹ ਫਿਰ ਉਹ ਸੱਤ ਵਿਚਾਰ ਛੁੱਟ ਗਿਆ ਜਾਂ ਤੇ ਦੀ ਘਟ ਜਾਣਨਾ ਕਿਰਪਾ ਹੋਣੀ ਹੈ ਕਿ ਗਿਆਨ ਆਪਾਂ ਨੂੰ ਚਬਰ ਵਿਚਾਰ ਚ ਮਿਲ ਲੈ। ਉਹਦੇ ਨਾਲ ਅੰਦਰ ਚੱਲਣ ਹੁਣ, ਹਿਰਦੇ ਵਿੱਚ ਘੱਟ ਚੰਨਣਾ। ਠੱਕ ਵਿੱਚ ਹਿਰਦੇ ਵਿੱਚ ਚੰਨਣਾ ਹੋਣਾ ਆ ਦੇ ਉੱਥੋਂ ਜਿਹੜਾ ਅੰデア ਹੈ, ਉੱਧਰ ਬਾਹਰਲਾ ਦਾ ਜੇ ਸੋਚਦਾ ਉਗਦਾ ਸੂਰਜ ਚੜ੍ਹੇ ਹਜ਼ਾਰ, ਅੰਦਰ ਨਹੀਂ ਚੰਨਣੂ ਬਾਹਰਲੇ। ਉਹ ਬੁੱਤੀ ਜਾਲ ਕੇ, ਦੀਵੇ ਜਾਲ ਕੇ। ਠੀਕ। ਦੀਵਾ ਉੱਧਰ ਜਾਲ ਲੈ। ਦੀਵੇ ਬਹਾਰ ਜਾਲ ਲਾਗੇ, ਜੋਤੇ ਦਾ ਸੂਰਜ ਬਾਹਰੋਂ ਕਰਦੇ। ਆਨੇਰ ਗਵਾਇਆ ਤਾਂ ਕਿਤੇ ਦਿਲ ਉਹ ਗੱਲ ਤਾਂ ਜਿਹੜੀ ਆ है ਜਿਹੜਾ ਹੈ ਦੂਰ ਹੋਣਾ ਦਿਓ ਜੀ ਲੋਹਾ ਪਾਰਸ ਭੇਟੀਐ ਕੰਚਨ ਹੋਇ ਆਇਆ ਨਾਨਕ ਸਤਗੁਰ ਮਿਲਿਐ ਨਾਉ ਪਾਈਐ ਮਿਲ ਨਾਮ ਧਿਆਇਆ ਹਾਂ ਜਿਵੇਂ ਲੋਹਾ ਜਦ ਨਾਲ ਪਾਰਸ ਦੇ ਨਾਲ ਛੂਣਾ ਨਹੀਂ ਫਿਰ ਆਇਆ ਅਫਜ਼ ਲਿਖਿਆ ਫਿਰ ਘਰ ਆ ਗਿਆ ਆਪਣੇ ਹਮੇਸ਼ਾ ਬਾਸਤੀ ਫਿਰ ਬਾਹਰ ਤਰਕੁੜੀ ਜਿੱ ਨਹੀਂ ਆਦਾ ਜੱਜ ਜੜ ਆਪਣੇ ਬੋਲ ਨਾਲ ਜਿਹੜੇ ਜੋ ਕੱਚ ਸਾਰਾ ਹੀ ਨਿਕਲ ਜਾਂਦਾ ਕੱਚ ਪਿੱਛੇ ਸਾਰਾ ਨਿਕਲ ਜਾਂਦਾ ਕੱਚ ਪਿੱਛੇ ਜਿਹੜੇ ਬੋਲਦੇ ਨੇ ਤੱਕੀ ਬੋਲੀ ਜਿਵੇਂ ਗੁਰਦਾਸ ਦੀ 12 ਨੇ ਹੋ ਇਤਿਹਾਸ ਵੀ ਇਤਿਹਾਸ ਉਹ ਛੱਡ ਦਿੰਦਾ ਫਿਰ ਕੁਝ ਵੀ ਨਹੀਂ ਲੱਭੜੂ ਲੱਭੜੂ ਨਾ ਫਰਬਾਨੀ ਤੋਂ ਜੇ ਜੋ ਖੋਜਾਂਗੇ ਕੁਝ ਜੋ ਕੋਈ ਜਿਸੋ ਪਾਦਾ ਗੁਰਬਾਣੀ ਅੰਦਰ ਨਹੀਂ ਖੋਜ ਕਰਾ ਰਹੀ ਜੀ ਗੁਰਬਾਣੀ ਦਾ ਸਰ ਹੈ ਕਿਵੇਂ ਪੋਜਣ ਕਿੱਥੋਂ ਮਿਲਣਾ ਜਿੱਥੋਂ ਹਰ ਪਾਇਆ ਜੀ ਨਾਨਕ ਸਤਗੁਰ ਮਿਲਿਏ ਨੋ ਪਾਈਏ ਮਿਲ ਤੇ ਆਇਆ ਸਤਿਗੁਰ ਮਿਲਿਆ ਕੋਈ ਸੱਚ ਦਾ ਗਿਆਨ ਰੱਖਣਾ ਮਿਲ ਜਵੇ ਇਹ ਸੱਚ ਦਾ ਗਿਆਨ ਆਪ ਨੂੰ ਹੀ ਮਿਲ ਜਵੇ ਕਿਸੇ ਤਰੀਕੇ ਨਾਲ ਸਮਝ ਆ ਜੇ ਗੁਰਬਾਣੀ ਚ ਕਿਵੇਂ ਮਿਲ ਜਵੇ ਨੋ ਪਾਈਏ ਇਹੀ ਰੋਗ ਦੀ ਪ੍ਰਾਪਤੀ ਹੈ ਸੱਚ ਦਾ ਗਿਆਨ ਮਿਲਣਾ ਹੀ ਰੋਗ ਦੀ ਪ੍ਰਾਪਤੀ ਹੈ ਜਿਹੜਾ ਐਲਬਮ ਅੱਗੀ ਕਹਿੰਦੇ ਜਿਹਦੇ ਉਹ ਆਈਡੀਆ ਪੰਕਤੀਆਂ ਲਾਇਆ ਨੇ ਨਾਮ ਤੇ ਪਰਥਾਏ ਵੀ ਵਸਵਾ ਹਲਕੇ ਵੀ ਹੁੰਦੇ ਕਿਤੇ ਵੀ ਰਾਮ ਪਤਾ ਵੀ ਇੱਕ ਪੰਕਤੀ ਲੈ ਕੇ ਇਹਨਾਂ ਨੇ ਕੀ ਉਹ ਵੀ ਕੁਰਬਾਨੀ ਦੀ ਪੰਕਤੀ ਦੀ ਹੈ ਐਸਾ ਬਟਰ ਖੜਾ ਕੀਤਾ ਹੈ ਸਮ ਦੀ ਵਜਤ ਮਨ ਹੈ ਨਾ ਜੀ ਮਨ ਕੱਚੀ ਬਾਣੀ ਦੇ ਨਾਲ ਬੜਾ ਜੁੜਦਾ ਯਾਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਗੁਰੂ ਗ੍ਰੰਥ ਜੀ ਮੰਨਿਓ ਉਹ ਵੀ ਕੱਚੀ ਬਾਣੀ ਹੈ ਉਹਦੇ ਨਾਲ ਜੁੜੇ ਹੋਏ ਆ ਪੰਜਵੇਂ ਪਾਤਸ਼ਾਹ ਨੇ ਪੋਥੀ ਸਾਹਿਬ ਲਿਖਿਆ ਉਹਦਾ ਕੋਈ ਖਿਆਲ ਨਹੀਂ ਕਰਦਾ ਗੁਰੂ ਦੀ ਲੋੜ ਸੀ ਮਿਲ ਗਿਆ ਸਿੱਧਾ ਹੀ ਉਹ ਗੁਰੂ ਦਾ ਜਾਦਾ ਜਾਂ ਚਾਲਣ ਹੋ ਜਾ ਗੁਰੂ ਹੈ ਉਹ ਲੈ ਲਓ ਗਿਆਨ ਗੁਰੂ ਛੱਡਤਾ ਪੋਥੀ ਸਾਹਿਬ ਨੂੰ ਗੁਰੂ ਬਦਲਿਆ ਭਾਈ ਅੱਖਰ ਦੇ ਕਹਾ ਫਿਰ ਅੱਖਰਾਂ ਮੈਂ ਕੋਈ ਪਰਮਾ ਖੋਜੇ ਤੇ ਹੈ ਉਹ ਆਫੀਸ਼ਰਟ ਇਹ ਕੋਈ ਨਾ ਜਿਹੜਾ ਗ੍ਰੰਥ ਹੈ ਆ ਅੱਖਰ ਦੇ ਅੰਸ਼ਬਦ ਕਰਨਾਂ ਦਾ ਵਿਸ਼ਾ ਹੈ ਅੱਖਰ ਅੱਖਾਂ ਦਾ ਵਿਸ਼ਾ ਉਹ ਯੂਨੀਵਰਸਿਟੀ ਵਾਲਿਆਂ ਨੇ ਜਦੋਂ ਗੱਲ ਕੀਤੀ ਵਿਦਵਾਨਾ ਉਹ ਕੜਕ ਸਮਝਦੇ ਉਹ ਤਾਂ ਹੀ ਬੋਲਦੇ ਉਹਨਾਂ ਨੂੰ ਪਤਾ ਸਾਰੀ ਗੱਲ ਦਾ ਉਹ ਸਮਝਦੇ ਨਹੀਂ ਵਿਦਵਾਨ ਜਿਹੜਾ ਧਰਮ ਦੇ ਫਿਰ ਵੀ ਜਿਹੜੇ ਸਮਝ ਵਾਲੇ ਨੇ ਖੋਜੀ ਉਹ ਅਸਲ ਤੋਂ ਵਿਦਵਾਨ ਹੈ ਇਹ ਯੂਨੀਵਰਸਿਟੀ ਵਾਲੇ ਹੁਤਾ ਖੋਜੀ ਨੇ ਸਾਰੇ ਉਹਨਾਂ ਦੇ ਹੀ ਸਿਰਾਂ ਮਲਦਾ ਜਦੋਂ ਉਹ ਰਾਹ ਮਿਲ ਗਿਆ ਚੁੱਪ ਕਰਕੇ ਲੱਗੇ ਰਹੇ ਆਪਣੇ ਕੰਮ ਜਿਹਨਾਂ ਉਡੀ ਵਿਰੋਧ ਕਰਦੇ ਕੱਲੂਆਂ ਵੀ ਵਿਰੋਧ ਬਰੋਤਾਉ ਕਰਦੇ ਨੇ ਜਿਹਨਾਂ ਜਿਹੜੇ ਪੱਲੇ ਹੀ ਕੱਖ ਦੀ ਹੈ ਐਵੇਂ ਹੀ ਬੜੇ ਬੈਠੇ ਨੇ ਸੰਤ ਮਹਾਂਪੁਰਖ ਉਹਨਾਂ ਵਿਦਵਾਨਾਂ ਜਿੰਨਾ ਵੀ ਇਹਨਾਂ ਕੋਈ ਨਹੀਂ ਜਿਹੜੇ ਬਿਜਾ ਦੇ ਚੁੱਪ ਕਰੇ ਬੈਠੇ ਜੀ ਨਾਨਕ ਸਤਗੁਰੂ ਮਿਲਿਐ ਨਉ ਪਾਈਐ ਮਿਲੀ ਨਾਮ ਧਿਆਇ ਨਉ ਤਾਂ ਤਾਂ ਹੀ ਪਾਇਆ ਜੇ ਸਤਗੁਰ ਮਿਲੂਗਾ ਸੱਚ ਦਾ ਗਿਆਨ ਰੱਖਣ ਵਾਲਾ ਸੱਚ ਦਾ ਗਿਆਨ ਗੁਰਬਾਣੀ ਕੋਲ ਹੈ ਚਲੋ ਬਸ ਦੇ ਗੁਰਬਾਣੀ ਹੈਗਾ ਇੱਥੇ ਲੱਭ ਲਓ ਖੋਜ ਲਓ ਖਰਾਂਜ ਅਖਰਾਮੇ ਕੋਈ ਗੱਥਿਆ ਫਿਰ ਭਾਈ ਜੀ ਨੇ ਖੋਜ ਲਿਆ ਹੋਵੇ ਉਹ ਦੱਸ ਦਵੇ ਕੋਈ ਗੁਰਮੁਖ ਗੁਰਮੁਖਾ ਉੱਚਾ ਗੁਰਮੁਖ ਨਾਲ ਪੁੱਛਦਾ ਫਿਰ ਪੁੱਛ ਕੇ ਬੁਝਾਉਂਦਾ ਦੂਸਰੇ ਨੂੰ ਕੋਸ਼ਿਸ਼ ਕਰਦਾ ਵੀ ਭਾਈ ਇਹਨਾਂ ਦੇ ਵੀ ਸਭ ਕੀ ਹੈ ਕਹਤਾ ਉਹ ਗੱਲ ਹੋਵੇ ਜਾਂ ਫਿਰ ਤੁਸੀਂ ਆਪ ਖੋਜ ਲੋ ਦੋਏ ਗੱਲਾਂ ਹਸ ਗਰੀਆਂ ਕਬੀਰ ਨੇ ਆਪੇ ਖੋਜਿਆ ਸੀ ਫਿਰ ਬਹੁਤਿਆਂ ਨੂੰ ਪਤਾ ਲੱਗ ਗਿਆ ਠੀਕ ਹੈ ਜੀ ਕਾਲ ਮੈਨੂੰ ਤਾਂ ਆਪ ਖੋਜਣਾ ਪਊਗਾ ਜਿਨ ਕੈ ਪੋਤਾ ਪੁਨ ਹੈ ਤਿਨੀ ਦਰਸ਼ਨ ਪਾਇਆ ਜਿਨ ਕੈ ਪੋਤੇ ਪੁਨ ਹੈ ਜਿਹੜਾ ਨਾ ਇਹਦਾ ਪੋਤਾ ਪੋਤਾ ਹੁੰਦਾ ਹੈ ਆਪਾਂ ਕਿਥੇ ਕਾਲਖ ਤੇ ਜਿਹੜਾ ਪੋਤਾ ਚਿੱਟਾ ਰੰਗ ਫੇਰ ਦਿੰਦੇ ਪੋਤਾ ਫੇਰਦੇ ਜੁੱਲੇ ਤੇ ਪੋਤਾ ਫੇਰ ਦਿੰਦੇ ਨੇ ਰੋਜ ਜੀ ਚ ਹੈ ਰਿਵਾਜ ਹੈ ਕਿਉਂਕਿ ਚਿੱਲਾ ਗਾਲਾ ਹੋ ਜਾਂਦਾ ਹੈ ਜੇ ਅਸੀਂ ਗਲਤੀ ਹੈ ਦਾ ਪੋਤਾ ਫੇਰ ਦਿੰਦੇ ਨੇ ਤੇ ਰੋਜ ਉਹ ਪੋਤਾ ਕਹਿੰਦੇ ਜਿਹੜੀ ਗਿਆਨਤਾ ਹੈ ਉਹਦੇ ਤੇ ਜਿਹਨ ਦਾ ਪੋਤਾ ਫੇਰੀਏ ਉਹ ਪੁੱਤ ਜਿਹਨ ਕੇ ਪੁੱਤੇ ਪੁੱਤ ਜਿਹਦਾ ਨਾ ਪੁੱਤੇ ਚ ਪੁੱਲ ਪਾਪ ਨਹੀਂ ਹੈ ਅਗਿਆਨਤਾ ਦਾ ਪੋਤਾ ਬਣਾ ਕਾਲਾ ਕਰਦੇ ਬੁੱਧ ਕਾਲੇ ਤੈਨ ਜੇ ਤੂੰ ਅਕਲਤੀ ਫਿਰਦਾ ਫਿਰਦਾ ਕੇ ਜੇ ਤੂੰ ਅਕਲ ਹੈ ਵਾੜਾ ਹੈ ਤਦ ਅਗਿਆਨਤਾ ਜੋ ਬਣਾਉਣਾ ਰੋਜ਼ ਨਹੀਂ ਦੇ ਗਿਆਨ ਦੇ ਲੋਕਾਂ ਉਹ ਤੇਰੇ ਪੋਤੇ ਪੁੱਨ ਹੋਣਾ ਚਾਹੀਦਾ ਪੁੱਨ ਦਾ ਭਲਾ ਤੇਰਾ ਵੀ ਭਲਾ ਉਹਦਾ ਵੀ ਭਲਾ ਉਹ ਬੜੂ ਹੁੰਦਾ ਆਤਮਾ ਦੇ ਲੈਵਲ ਤੇ ਕੁਝ ਦਈਏ ਤਾਂ ਉਹ দান ਜਿਹੜਾ ਹੁੰਦਾ ਹੈ ਜਾਂ ਕਿਸੇ ਤੇ ਕਸ ਉਹ ਦੇਖੋ ਵੀ ਆਤਮਾ ਦੇ ਲੈਵਲ ਤੇ ਰੂਹੀ ਲਾਭ ਹੁੰਦਾ ਹਾਂਜੀ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਏ ਇਹ ਪੁੰਨ ਜੀ ਗਾਏ ਗੁਣ ਗੋਬਿੰਦ ਕੌਣਾ ਹੀ ਪੁੰਨ ਹੈ ਨਹੀਂ ਕੋਈ ਉਹਨਾਂ ਨੇ ਤਿੰਨ ਦਰਸ਼ਨ ਪਾਇਆ ਦਰਸ਼ਨੇ ਉਹਨਾਂ ਦੇ ਦਰਸ਼ਨ ਕੀ ਦਾ ਆਪਣਾ ਆਪਣੇ ਬੂਲ ਦਾ ਅਦਰ ਤੇ ਮਰਮਿਤੋਂ ਬਲਵੇਂ ਆਪ ਹੈ ਜਿਹੜਾ ਉਹਦਾ ਦਰਸ਼ਨ। ਆਪਣੇ ਮੂੜ ਦਾ ਦਰਸ਼ਨ ਕਰ। ਜੀ ਜੋ ਇਹਨਾਂ ਦੀ ਹਕੂਰਤ ਵਜੂਦ ਹੈ ਬਲਗੁਦੀ ਉਹਦਾ ਦਰਸ਼ਨ ਹੈ। ਠੀਕ ਹੈ ਜੀ। ਪੁੱਤ ਇੱਥੇ ਮਨ ਵਾਸਤੇ ਤਾਂ ਨਹੀਂ ਆਇਆ ਵੀ ਜਿੰਨ ਕਾ ਪੋਤੇ ਪੁੱਤ ਹੈ ਤੀਨ ਦਰਸ਼ਨ ਪਾਇਆ। ਨਹੀਂ ਦੇਖੋ ਨਾ ਜੇ ਆਪਾਂ ਕੇ ਜਿਹੜੂ ਉਪਦੇਸ਼ ਕਰਾਂਗੇ ਉਹ ਪੋਤਾ ਚਿਰਦਾ। ਜਿਹੜਾ ਉਪਦੇਸ਼ ਕਰਦਾ ਨਾ ਸਤਗੁਰੂ ਦੀ ਗੱਲ ਆਈ ਹੈ ਨਾ ਪਹਿਲਾਂ। widehat par oh hai jehda oh updesh karda ohde naal ohda jehda putt hovey phala hovey jido updesh suneya ohda vi phala te jehda fed hai putra ohnu vi hor milda ohda tan jehda badhda hi hai gyan ohda katda nahi hai is sant vich aayi ik darshan paaya ohna nu samjho ohnu darshak tak pahunch jande ne je pehla gyan khat vi ਉਹ ਕਰਦੇ ਕਰਦੇ ਕਰਦੇ ਕਰਦੇ ਜਦ ਦੂਜਿਆਂ ਨਾਲ ਡਿਸਕਸ ਕਰਦੇ ਹਨ ਜਿਵੇਂ ਆਪਾਂ ਬਹਿ ਕੇ ਸੰਗਤ ਵਿੱਚ ਤਾਂ ਪਹੁੰਚਦੇ ਪਹੁੰਚਦੇ ਸਿਰੇ ਤੇ ਪਹੁੰਚਾਂਗੇ ਆਪਾਂ ਮਾਲ ਖੜੇ ਹੋਣਗੇ ਦੂਜਿਆਂ ਦੇ ਜੇ ਸਾਲੂ ਜਵਾਬ ਦੇਣੇ ਪੈਣਗੇ ਜੇ ਸਾਡੇ ਕੋਲ ਜਵਾਬ ਨਹੀਂ ਅਸੀਂ ਹੋਰ ਖੋਜ ਕਰਾਂਗੇ ਜਿੱਦਾਂ ਸਾਡੂੰ ਪਰਮਹੰਸ ਜੀ ਕਹਿੰਦੇ ਅਸੀਂ ਪਹੁੰਚਨੇ ਜਦ ਸਾਡੇ ਕੋਈ ਐਸਾ ਸਵਾਲ ਨਹੀਂ ਰਹੂ ਸਾਡੇ ਕੋਲ ਜਵਾਬ ਨਹੀਂ ਫਿਰ ਤੋਤੇ ਪੁੱਦ ਸਮਝੋ ਫਿਰ ਦਰਸ਼ਕਾਂ ਠੀਕ ਹੈ ਜੀ ਇੱਥੇ 19ਵੀਂ ਪੌੜੀ ਸਮਾਪਤੀ ਹੈ ਜੀ